ਜੇ ਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿੱਤ ਕਿਛ ਸੋਝੀ ਪਾਏ ਵਿਣ ਡਿੱਠਾ ਕਿਐ ਸਾ ਲਾਹੀਏ ਅੰਦਾ ਅੰਧ ਕਮਾਈ ਆਹ ਅੰਦਰ ਜੇ ਚਲਣੇ ਦੀ ਹੋਇਆ ਗਿਆਨ ਆਇਆ ਹੀ ਨਹੀਂ ਗਿਆਨ ਪੈਦਾ ਹੋਇਆ ਅੰਦਰ ਗਿਆਨ ਵੇ ਪਰਵੇਸ਼ ਕੀਤਾ ਅੰਦਰ ਰੋਸ਼ਨੀ ਹੋਈ ਨਹੀਂ ਅੰਦਰ ਫਿਰੋ ਸੋਝੀ ਗਾਦੀ ਆਉਣੀ ਕਿਥੋਂ ਅੰਤਰ ਗਿਆਨ ਨਾ ਆਇਓ ਜਿੱਤ ਕਿ ਸੋਝੀ ਪਾਏ ਸੋਝੀ ਜਾਣਨ ਦੀ ਉਹੀ ਦੂਹੇ ਸੋਝੀ ਕਿ ਹੋਇਆ ਜਿਹਦੇ ਅੰਦਰ ਮਾਇਆ ਦਾ ਗਿਆਨ ਬਥੇਰਾ ਜੇ ਰਹਿ ਜਾਊਗਾ ਮਾਇਆ ਤਾਂ ਪਰੇ ਜਾਣਾ ਤਾਂ ਸੋਝੀ ਚਾਹੀਦੀ ਹੈ ਜੋਤ ਦੀ। ਇੱਥੇ ਫਿਰ ਗਿਆਨ ਨੂੰ ਔਕਰ ਲਾਇਆ ਇਹ ਖਾਸ ਗਿਆਨ ਦੀ ਗੱਲ ਹੈ ਜੀ ਅੰਤਰ ਗਿਆਨ ਨਾਲ ਆਇਓ। ਗਿਆਨ ਫਿਰ ਅੰਦਰਾ ਗਿਆਨ ਦੋ ਠੀਕ ਹੈ। ਵਿਨ ਡਿੱਠਾ ਕਿਆ ਸਲਾਹੀ ਹੈ ਅੰਦਾ ਅੰਦ ਕਮਾਏ ਜਿਹੜੀ ਚੀਜ਼ ਨੂੰ ਦੇਖਿਆ ਹੀ ਨਹੀਂ ਆਪਾਂ ਨੇ ਜਿਹਦੇ ਬਾਰੇ ਜਾਣਦੇ ਹੀ ਕੁਛ ਨਹੀਂ ਉਹਦੀ ਸਿਰਸਲਾ ਕਰੀ ਗਈ ਹੈ ਤਾਂ ਫੇਰੇ ਚ ਟਕਰਾ ਮਾਰਦਾ ਅੰਦਾ ਅੰਦ ਕਮਾਏ ਸੁਣ ਸੁਣ ਵੱਡਾ ਆਖੇ ਸਭ ਕੋਈ ਨਹੀਂ ਕਰਨਾ ਕੇਵੜ ਆਹ ਤਾਂ ਸ਼ਬਦ ਦੇ ਵਿੱਚੋਂ ਪਛਾਣਦੇ ਆ ਹਾਂ ਜੋ ਗੁਰਬਾਣੀ ਹੈ ਨਾ ਇਹਦੇ ਵਿੱਚੋਂ ਜਾਣਨਾ ਪਛਾਣਨਾ ਇਹਦੇ ਵਿੱਚੋਂ ਪਛਾਣ ਸ਼ਬਦ ਪਛਾਣ ਲਈਏ ਉਹ ਵਿਦੇਸ਼ ਵਿੱਚੋਂ ਪਛਾਣਦੇ ਆ ਜਿਹਨਾਂ ਜਾਣਿਆ ਤੇ ਪਛਾਣਿਆ ਜੋ ਉਹਦੇ ਸਾਥ ਕਰਮ ਉਹ ਬੋਲੇ ਕਿ ਜਾਣਿਆ ਨਹੀਂ ਤਾਂ ਪਛਾਣੂ ਕ ਮਾਨਕ ਸ਼ਬਦ ਪਛਾਣੀਆਂ ਨਾਮ ਬਸੇ ਮਨ ਆਈ ਉਹਦੇ ਨੂੰ ਤਾਈ ਵਾਰ ਤੇ ਬਸੂਗਾ ਜੇ ਸ਼ਬਦ ਦੇ ਵਿੱਚੋਂ ਕੋਈ ਪਛਾਣਨਾ ਦੇ ਬੁੱਝਾ ਫੁੱਝਾ ਹੇ ਮਹੱਲਾ ਤੀਜਾ ਕਾ ਬਾਣੀ ਇਤ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਤ ਸੱਚ ਰਤਨੀ ਭਰੇ ਭੰਡਾਰ ਜੇ ਬਾਣੀ ਕਾ ਜਿਵੇਂ ਦੇਖੋ ਨਾ ਆਪਣੇ ਕਿੰਨੀਆਂ ਦੀ ਬਾਣੀ ਹੈ ਗੁਰੂ ਭਗਤਾਂ ਦੀ ਬਾਣੀ ਗੱਲ ਹੈ ਬਾਣੀ ਮਤਲਬ ਹੈ ਇਹ ਬਾਣੀ ਕਾ ਗਿਆਨਵਿਕ ਹੈ ਇੱਕਾ ਸ਼ਬਦ ਵਿਚਾਰ ਲਿਓ ਸ਼ਬਦ ਵਿਚਾਰ ਕੇ ਪੈਦਾ ਹੋਣਾ ਕੋਈ ਚੀਜ਼ ਪੈਦਾ ਹੁੰਦੀ ਚਾ ਵਿਚਾਰ ਕਰਦਾ ਹੋਰ ਬਾਣੀ ਦੀ ਕੋਈ ਗੱਲ ਨਿਕਲਦੀ ਹੋਵੇ ਉਹ ਕਿਹੜੀ ਚ ਲਿਖਿਆ ਜੀ ਸਤ ਸੰਤੋਖ ਵਿਚਾਰੋ ਆਛਾ ਠੀਕ ਹੈ ਜੀ ਸੱਚਾ ਸੋਧਾ ਹੱਤ ਸੱਚ ਰਤਨੀ ਭਰੇ ਭੰਡਾਰ ਸੱਚਾ ਸੌਦਾ ਇਹ ਸੌਦਾ ਸੱਚਾ ਹੈ ਸੱਚਾ ਸੌਦਾ ਪਾਇਆ ਹੋਇਆ ਛੁੱਟ ਰਿਹਾ ਹੈ ਸੱਚ ਰਤਨੀ ਭਰੇ ਬਣਾ ਦੇ ਤਾਂ ਰਤਨ ਕੋਣ ਲੈ ਕੋਣ ਪਾਇਆ ਹੈ ਕੋਈ ਸ਼ਬਦੀ ਰਤਨੀ ਦੇ ਹੀ ਟੋਟ ਇਹ ਗਿਆਨ ਦਾ ਸਾਗਰ ਹੈ ਗੁਰਬਾਣੀ ਇਹਦੇ ਵਿੱਚ ਰਤਨ ਦਾ ਘਟ ਹੈ ਤੇ ਸਾਰੇ ਗੁਣ ਨੇ ਉਹਦੇ ਕੱਲਾ ਕੱਲਾ ਕੋਣ ਰਤਨ ਸਾਰੇ ਜੋ ਪਹਿਲਾਂ ਤਾਂ ਮਤਲਬ ਅੱਗੇ ਪਿੱਛੇ ਲਿਖਿਆ ਹੱਟ ਸਚ ਦੀ ਐ ਤੇ ਇੱਥੇ ਸੌਦਾ ਵੀ ਸੱਚ ਦਾ ਹੀ ਮਿਲਦਾ ਹੈ ਜੀ ਹਾਂ ਗੁਰ ਕਿਰਪਾ ਤੇ ਪਾਈਨ ਜੇ ਦੇਵ ਦੇਵਨ ਹਾਰ ਅਜੇ ਦੇਵਨ ਹਾਰ ਦੇਵੇ ਤਾਂ ਗੁਰ ਆਜੇ ਗੁਰਬਾਨੀ ਕਿਸੇ ਨੂੰ ਪ੍ਰਾਪਤ ਹੋ ਜਵੇ ਮਿਲ ਜਵੇ ਗਿਆਨ ਕਿਰਪਾ ਨਾਲ ਆਪਣੀ ਕੋਲ ਗਿਆਨ ਚਾਹੀਦਾ ਸਭਨੂੰ ਯਾਨੀ ਸਭਨਾਂ ਲਈ ਵਾਸਤੇ ਗੁਰਬਾਣੀ ਵੀ ਇੱਕ ਅਵਸਥਾ ਚਾਹੀਦੀ ਹੈ ਹਰੇਕ ਨੂੰ ਇਹ ਸਮਝ ਆਉਂਦੀ ਹੈ ਗੁਰ ਕਿਰਪਾ ਦਾ ਮਤਲਬ ਇਹ ਹੈ ਇੱਥੇ ਕਿ ਗਿਆਨ ਦੀ ਕੋਲ ਹੈ ਉਹ ਨੂੰ ਸਮਝ ਆਉਂਦੀ ਉਹ ਇੱਕ ਖਾਸ ਸਟੇਟ ਪਹਿਲਾਂ ਹੀ ਗਿਆਨ ਹੁੰਦਾ ਹੈ ਕੋਦਰ ਕੋਲ ਬਲੋ ਕੋਲ ਕੋਦਰ ਕੀ ਪਿਛਲੇ ਗਿਆਨ ਦੀ ਕਮਾਈ ਹੁੰਦੀ ਹੈ ਉਹ ਕੋਦਰ ਕੀ ਹੈ ਉਹਨਾਂ ਦੇ ਸਮਝ ਆਉਂਦੀ ਹੈ ਗੁਰ ਕਿਰਪਾ ਦਾ ਮਤਲਬ ਇੱਥੇ ਉਹਦੇ ਗਿਆਨ ਦੀ ਕਿਰਪਾ ਨਾਲ ਉਹ ਪੱਲੇ ਪੈਂਦਾ ਕੁਝ ਕੋਈ ਨਹੀਂ ਪੱਲੇ ਪੈਂਦਾ ਗੁਰ ਕਰਪਾ ਤੇ ਪਾਈ ਹੈ ਜੇ ਦੇਵੇ ਦੇਵਨ ਹਰ ਜੇ ਦੇਵੇ ਦੇਵਨ ਹਰ ਕੋਲ ਗਿਆਨ ਹੋਵੇ ਉਦੋਂ ਫਿਰ ਉਹਨੂੰ ਵਿਚਾਰੀਏ ਤਾਂ ਕਿਤੇ ਸਮਝ ਆਉਂਦੀ ਸਰ ਸੌਦਾ ਲਾਭ ਸਦਾ ਫਟਿਆ ਨਾਮ ਆਧਾਰ ਜੇ ਸੌਦੇ ਚ ਸਦਾ ਲਾਭ ਹੈ ਸੱਚਾ ਸੌਦਾ ਵੜ ਜੀ ਇਹ ਤਾਂ ਲਾਭ ਵਿੱਚ ਘਾਟਾ ਦੀ ਹੁੰਦਾ ਲਾਭ ਸਦਾ ਤੁਹਾ ਨਾਮ ਆਧਾਰ ਜੋ ਵੀ ਖੱਟੀ ਆ ਨਾਮ ਆਧਾਰ ਹੈ ਆਪ ਦੀ ਕਮਾਈ ਹੈ ਇਹਦੇ ਚ ਕੀਤੇ ਜੀ ਕਮਾਈ ਹੈ ਕਰਮ ਤੇ ਆਵਣ ਹਾਰ ਨਾਨਕ ਸੱਚ ਕਾ ਲਾਹੀਏ ਅੰਮ੍ਰਿਤ ਪ੍ਰਗਟਿਆ ਦੇਖੋ ਬੇਖਾ ਸ਼ਰੀਰ ਆਇਆ ਹੈ ਇਹਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ शरीर तं आया बिह हां जी विच अमृत प्रकट हो गया रे वेग विच अमृत प्रकटया शरीर विचदा सी आयादा सी पैदा होया अमृत विच एडे प्रकटया कर्म पियावन हार ਹਾਲ ওভার ਕੌਣ ਆ ਜੀ ਧੰਨ ਸਵਾਰਨ ਹਾਰ ਸਵਾਰਨ ਹਾਰ ਦਾ ਬੁੰਦੀ ਆ ਬਵੇਗ ਬੁੰਦੀ ਪਰ ਇੱਥੇ ਔਕੜ ਨਾਲ ਲਿਖਿਆ ਹੋਇਆ ਧੰਨ ਸਵਾਰਨ ਹਾਰ ਉਹ ਲਿਖੂਗਾ ਡਾਕਟਰ ਲੋ ਚਿਤਨੀ ਆ ਇਹ ਧੰਨ ਸਵਾਰਨ ਹਾਰ ਜੀ ਨੇ ਸਵਾਰਿਆ ਮਨ ਅਜੇ ਵੇਦਾ ਮਾਤਾ ਲਿਖ ਦੱਸਣਾ ਇੱਕੋ ਹੀ ਆ ਜਦੋਂ ਲਿਖ ਦਿਓ ਉਹ ਸਵਾਰਨahari ਨਹੀਂ ਹੈ ਬ विवेक ਕਹੋ ਜਾਂ ਬ विवेक ਬੁੱਧੀ ਕਹੋ ਓਕੇ ਜੀ ਬ विवेक ਜਿਹੜਾ ਇਹ ਸਵਾਰਨahari ਹੈ ਹਾਂਜੀ ਹਾਂਜੀ ਹਾਂਜੀ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾ ਜੇ ਕੋ ਬੋਲੇ ਸੱਚ ਕੂੜਾ ਅੰਦਰ ਕੂੜ ਵਰਤਦਾ ਉਹਨਾਂ ਨੂੰ ਕਹਿੰਦੇ ਸੱਚ ਨਹੀਂ ਜਿੱਡਾ ਲੱਗਦਾ ਉੱਥੇ ਚੱਲ ਜਾਂਦੇ ਨੇ ਉਹ ਕਹਿੰਦੇ ਨੇ ਵੀ ਇਹ ਸੱਤੇ ਵਿਰੁੱਧ ਗੱਲ ਕਰਦਾ ਅਸੀਂ ਤਾਂ ਇੰਨਾ ਚਿਰ ਹੋ ਗਿਆ 14 ਸਾਲ ਪਿਆ ਗੱਲ ਕਰਦੇ ਆਏ ਹੁਣ ਇਹ ਇੱਕ ਵਗੈਰੇ ਦੀ ਗੱਲ ਠੀਕ ਉਹ ਜਲ ਜਾਂਦੇ ਕਰਦੇ ਨੇ ਇਸ ਗੱਲ ਦਾ ਜਿੰਨਾ ਵਰਤੈ ਸੱਚ ਨਾ ਭਾਵਾਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਤਾਂ ਮਿਟੂਗਾ ਹੀ ਤੇ ਜਲ ਜਾਂਦਾ ਫਿਰ ਪਾਪੜ ਦੇ ਵਿੱਚ ਹੋਰ ਕੀ ਹੈ ਕੂੜੀ ਆਈ ਰੱਜੇ ਕੂੜ ਜਿਉ ਬਿਸ਼ਟਾ ਕਾਗ ਖਾਵੇ ਇਸ ਹਰ ਹੋਏ ਕਿਰਪਾਲ ਤੋ ਨਾਮ ਜਿਵੇਂ ਕਾਗ ਰਾਜ ਖਾ ਕੇ ਉਹ ਕੂੜਾ ਕਾਗੇ ਹੁੰਦਾ ਕਾਗਾ ਕਰਕੇ ਟੋਲੇ ਆ ਤੁਸੀਂ ਕਾਗ ਕੇ ਉਹਨੂੰ ਤੇ ਰਹਿੰਦਾ ਹੈ ਥਰੀਰ ਦੀ ਖਰਾਕ ਇਹ ਵੀ ਖਰਾਕ ਹੈ ਬਿਸ਼ਟਾ ਖਾ ਕੇ ਕਾਗੇ ਰਹਿੰਦਾ ਉਹਦੀ ਖਰਾਕੇ ਉਹ ਜਿਸ ਹੋਏ ਕਿਰਪਾਲ ਸੋ ਨਾਮ ਧਿਆਵੇ ਤੇ ਕਿਰਪਾ ਕਰੇ ਨਾਮ ਤੇ ਹੁੰਦਾ ਕਾਹ ਤੋਂ ਆਉਂਦਾ ਕੋਈ ਦੂਰ ਇਹ ਤਾਂ ਕੋਈ ਉਹਦੀ ਕਿਰਪਾ ਹੀ ਹੁੰਦੀ ਹੈ ਸਾਹੀ ਉੱਥੇ ਆਉਂਦੇ ਨੇ ਬਣੇ ਹਰ ਗੁਰੂ ਨਾਮ ਰਾਦ ਕੂੜ ਪਾਪ ਲੈ ਜਾਵੇ ਅਜਿਹਦਾ ਯਾਦ ਕਰਦੇ ਨਾ ਨਾਮ ਦੀ ਉਹ ਤਾਂ ਉਹਦੇ ਅੰਦਰ ਪਾਪ ਲੈ ਜਾਂਦੇ ਕੂੜ ਦਾ ਰੰਗ ਦਾ ਪਾਪ ਦਾ ਰੰਗ ਉਹਨਾਂ ਦਾ ਦੂਰ ਹੋ ਜਾ ਇਹ ਗੱਲ ਇੱਥੇ 10ਵੀਂ ਪੜ੍ਹਾਈ ਸਮਾਪਤੀ ਹੈ ਜੀ ਕੋਈ ਜੀ